ਯੋਗਾ ਅਸਨਾਂ ਦੀ ਕਲਾਸ ਸ਼ੁਰੂ ਕਰ ਰਹੇ ਪਿਆਰੇ ਜਿਗਿਆਸੂਆਂ ਨੂੰ ਮੈਂ ਡਾਕਟਰ ਇਕਬਾਲ ਸਿੰਘ ਦੋਵੇਂ ਹੱਥ ਜੋੜ ਕੇ ਨਮਸਕਾਰ ਕਰਦਾ ਹਾਂ ਅਤੇ ਆਪ ਜੀ ਨੂੰ ਬੇਨਤੀ ਕਰਦਾ ਹਾਂ ਕਿ ਆਪ ਜੀ ਆਪਣਾ ਆਸਣ ਛਾ ਕੇ ਪਦਮਾਸਨ ਜਾਂ ਸੁਖਾਸਨ ਵਿੱਚ ਚੌਕੜੀ ਮਾਰ ਕੇ ਬੈਠ ਜਾਓ। ਕਮਰ ਅਤੇ ਗਰਦਨ ਸਿੱਧੀ ਕਰ ਲਓ ਅਤੇ ਆਪਣੀ ਸੁਰਤੀ ਨੂੰ ਕਾਗਰ ਕਰਦੇ ਹੋਏ ਪਰਮ ਪਿਤਾ ਪ੍ਰਮਾਤਮਾ ਦੇ ਚਰਨਾਂ ਨਾਲ ਜੋੜ ਦਿਓ ਅਤੇ ਹਰ ਸਵਾਸ ਨਾਲ ਪ੍ਰਮਾਤਮਾ ਦਾ ਸਿਮਰਨ ਕਰਨਾ ਆਰੰਭ ਕਰਦੇ ਹਾਂ ਯੋਗ ਦਾ ਅਰਥ ਕੀ ਹੈ ਯੋਗ ਤੋਂ ਪਾਪ ਜੋੜ ਤੰਦਰੁਸਤੀ ਅਤੇ ਸਰੀਰ ਦਾ ਯੋਗ ਪਾਉ ਮਿਲਨ ਆਤਮਾ ਤੇ ਪਰਮਾਤਮਾ ਦਾ ਮਿਲਨ ਯੋਗ ਜਿੱਥੇ ਸੇਤ ਨੂੰ ਤੰਦਰੁਸਤ ਰੱਖਣ ਵਾਸਤੇ ਅਤੀ ਜ਼ਰੂਰੀ ਹੈ ਉਤਨਾ ਹੀ ਇਸ ਆਤਮਾ ਨੂੰ ਪਰਮਾਤਮਾ ਨਾਲ ਜੋੜਨ ਲਈ ਵੀ ਸਹਾਇਕ ਹੈ ਯੋਗਾ ਕਰਦੇ ਸਮੇਂ ਕੁਝ ਖਾਸ ਗੱਲਾਂ ਦਾ ਧਿਆਨ ਰੱਖਣਾ ਬੜਾ ਹੀ ਜ਼ਰੂਰੀ ਹੈ ਇਕ ਆਸਨ ਜਿਹੜੇ ਤੁਸੀਂ ਕਰਨ ਜਾ ਰਹੇ ਹੋ ਇਹ ਸ਼ਾਂਤ ਅਤੇ ਕਾਂਤ ਜਗ੍ਹਾ ਤੇ ਕਿਸੇ ਪਾਰਕ ਆਦ ਵਿੱਚ ਕੀਤੇ ਜਾਣ ਜੇਕਰ ਪਾਰਕ ਬਗੀਚੇ ਦੀ ਸਹੂਦਾ ਨਾ ਪ੍ਰਾਪਤ ਹੋਵੇ ਤਾਂ ਇਹ ਯੋਗ ਆਸਨ ਕਿਸੇ ਕਮਰੇ ਵਿੱਚ ਵੀ ਕੀਤੇ ਜਾ ਸਕਦੇ ਹਨ ਕਮਰੇ ਦੀਆਂ ਖਿੜਕੀਆਂ ਖੋਲ ਦਿਓ ਤਾਂ ਕਿ ਤਾਜੀ ਹਵਾ ਪ੍ਰਵੇਸ਼ ਕਰਦੀ ਰਹੇ ਜਿਸ ਆਸਨ ਤੇ ਤੁਸੀਂ ਯੋਗ ਕਰਨਾ ਹੈ ਉਹ ਨਾ ਤਾਂ ਜ਼ਿਆਦਾ ਸਖਤ ਤੇ ਨਾ ਹੀ ਜ਼ਿਆਦਾ ਪਤਲਾ ਹੋਵੇ ਤਾਂ ਕਿ ਆਸਣ ਕਰਦੇ ਸਮੇਂ ਤੁਹਾਨੂੰ ਕੋਈ ਦਿੱਕਤ ਪੇਸ਼ ਨਾ ਆਵੇ ਇੱਕ ਗੱਲ ਦਾ ਖਾਸ ਧਿਆਨ ਰੱਖੋ ਯੋਗ ਹਮੇਸ਼ਾ ਫੇਰੇ ਖਾਲੀ ਪੇਟ ਹੀ ਕੀਤੇ ਜਾਣ ਯੋਗ ਕਰਦੇ ਸਮੇਂ ਜੇਕਰ ਆਪ ਜੀ ਆਪਣੇ ਸਵਾਸ ਨੂੰ ਜਿਆਦਾ ਦੇਰ ਤੱਕ ਅੰਦਰ ਨਾ ਰੋਕ ਸਕੋ ਜਾਂ ਬਾਹਰ ਨਾ ਰੋਕ ਸਕੋ ਤਾਂ ਆਸਣ ਦੇ ਵਿੱਚ ਰੁਕੇ ਰਹਿਣਾ ਹੈ ਔਰ ਛੋਟੇ-ਛੋਟੇ ਸਵਾਸ ਲੈਣੇ ਚાલુ ਕਰਦੇ ਰਹਿਣਾ ਇਸ ਦੇ ਨਾਲ ਹੀ ਹੁਣ ਅਸੀਂ ਆਪਣੇ ਆਸਣਾਂ ਦੀ ਕਲਾਸ ਸ਼ੁਰੂ ਕਰ ਰਹੇ ਹਾਂ ਆਪਣੇ ਸਥਾਨ ਤੇ ਖੜੇ ਹੋ ਜਾਓ